ਚਲੋਕ ਮਹੱਲਾ ਤੀਜਾ ਥਾਲੇ ਵਿੱਚ ਤੈਂ ਵਸਤੂ ਪਈਓ ਹਰ ਭੋਜਨ ਮਨ ਤ੍ਰਿਪਤੀ ਹੈ ਪਾਈਏ ਮੋਖ ਦੁਆਰ ਥਾਲ ਦੇ ਵਿੱਚ ਤੈਂ ਹੈ ਥਾਲ ਕੀ ਹਾਂ ਜਿੰਨੇ ਗੁਰਵਾੰਿਆਂ ਹੈ ਕੀ ਅੱਖਰੂਪੀ ਥਾਲ ਹੈ ਹਾਂਜੀ ਅੱਖਰੂਪੀ ਥਾਲੇ ਹੈ ਦੇਖੋ ਖਾਵੇ ਦੇਖੋ ਕੋਈ ਚੇਤਸਕਾ ਹੋਇਆ ਧਾਰੋ ਲਿਖਿਆ ਤਾਂ ਹੋਇਆ ਪਿੱਛੇ ਜਾ ਇਹਦੇ ਵਿੱਚ ਕਹਿਣ ਵਾਸਤੇ ਜਿਹੜੀ ਪਾਈ ਹੈ ਇਹ ਰਹਦਾ ਹੈ ਕਹਿਣ ਦਾ ਤਰੈਬ ਆ ਸਾਥ। ਦੇਖੋ ਕਿ ਜਿਹੜੇ ਅੱਖਰ ਵੀ ਨੇ ਜਿਵੇਂ ਜਿਵੇਂ ਸਹਿ ਫਰਮਾਇਆ ਨੇ ਥਿਮੇ ਤੇ ਵਸੀ ਪਾਇਆ। ਕੋਈ ਉਹ ਕਹਿੰਦੇ ਸਾਨੂੰ ਫਰਮਾਇਆ ਹੈ ਉਹ ਮੈਂ ਅੱਖਰ ਵੀ ਹੋ ਗਏ ਪਾਏ। ਆਪਣੀ ਮਰਜ਼ੀ ਦਾ ਅੱਖਰ ਵੀ ਪਾਏ। ਕੋਈ ਇਹ ਕੋਈ ਅੱਖਰ ਅਸੀਂ ਆਪਣੀ ਮਰਜ਼ੀ ਨਾਲ ਜਿਹੜੀ ਪਾਇਆ। ਇਹ ਬਾਣੀ ਮਹਾਂਪੁਰਖ ਕੀ ਹੈ ਮਹਾਂਪੁਰਖ ਦੇ ਕਿ ਕੀ ਪਾਇਆ? ਹਰ ਭੋਜਨ ਅੰਮ੍ਰਿਤ ਸਾਰ ਹਰ ਭੋਜਨ ਪਾਇਆ ਜਿਹਦਾ ਭੋਜਨ ਪਾਇਆ ਅੰਤਰਾਸਰੋਂ ਦਾ ਭੋਜਨ ਖੰਗਾਲੀ ਦਾ ਭੋਜਨ ਗਿਆਨ ਪਾਇਆ ਇਹ ਕਹ ਲੋ ਇਹਦੇ ਵਿੱਚ ਬਸ ਸਭ ਹੋ ਜਾਂਦੀਆਂ ਗੁਰਲਾ ਭੋਜਨ ਤਾਂ ਅਜਿਹੜਾ ਬਾਹਰ ਅਸੀਂ ਖਾਂਦੇ ਹਾਂ ਮੇਰੇ ਬਣੂ ਵਾਲੀ ਮੈਨੂੰ ਉਹ ਨਹੀਂ ਚੰਗੀ ਲੱਗਦੀ ਇਹਦਾ ਮਾਇਆ ਦੇ ਨਾਲ ਜੁੜਿਆ ਹੈ ਮਾਇਆ ਦੇ ਸਰੀਰ ਨੂੰ ਭੋਜਨ ਵੀ ਬਾਹਰੋਂ ਆਉਂਦਾ ਹੀ ਹੈ ਉਹ ਅੰਤਰਾਸਰੋਂ ਦਾ ਭੋਜਨ ਇਹਦੇ ਵਿੱਚ ਪਾਇਆ ਹੈ ਅੰਤਰਾਜ ਵਾਂਗ ਇਹਨੇ ਤਕਰੀ ਹੁੰਦੀ ਹੈ ਵਿਦਵਾਨ ਹੁੰਦੀ ਹੈ ਸੋਸਤ ਹੁੰਦੀ ਹੈ ਉਹਦੀ ਹੌਂਕ ਨਿਕਲ ਜਾਂਦੀ ਹੈ ਹੋ ਵਿੱਚ ਆਇਆ ਹੋ ਵਿੱਚ ਗਿਆ ਜਾਂਦਾ ਜਿਹੜਾ ਹੋ ਚਲੀ ਹੋਰ ਵੀ ਛੱਤੀ ਅੰਮ੍ਰਿਤ ਦੇ ਰੋਦੂਏ ਥਾਂ ਦੇ ਵਾਲੇ ਸਰੀਰ ਦੇ ਇਹ ਸਾਰ ਅੰਮ੍ਰਿਤ ਇੱਕੋ ਹੀ ਹੈ ਉਹਨਾਂ ਆਪ ਉੱਪਰ ਦਾ ਜਿਹੜਾ ਉਹ ਸਾਰ ਅੰਮ੍ਰਿਤ ਹੈ ਉਹ ਇੱਕੋ ਹੀ ਹੈ ਉਹ ਛੱਤੀ ਹੋਰ ਵੀ ਲਿਖਿਆ ਰਿਹਾ ਨਾ ਉਦੋਂ ਉਹ ਤਾਂ ਵੱਖਰਾ ਕਰਕੇ ਤਾਂ ਕਿ ਆਇਆ ਸਾਲ ਆਇਆ ਹੈ ਨਾ ਹਾਂ ਤੇ ਦਿਖੋ ਨਾਲ ਪੇਟ ਲੱਗ ਜੀਏ ਵਰਤਰੇ ਤੇ ਕੋ ਲੱਗੀ ਪਿਆਸ ਅਬਰ ਕੋਈ ਲੱਗੀ ਪਿਆਸ ਪੀਤਾ ਨਹੀਂ ਖਾਦਾ ਹੈ ਕੋਈ ਇਹ ਤਾਂ ਸਮਝੋ ਇਹ ਅਮਰਤ ਪੌਂਦੀ ਹੈ ਉਹ ਪੀਤੀ ਜਲਦੀ ਹੈ ਖਾਣ ਵਾਲੀ ਹੈ ਤੇ ਖਾਣ ਵਾਲੀ ਤੇ ਪੀਣ ਵਾਲੀ ਕੋਈ ਅੰਤ ਹੈ ਕਿਆ ਖਾਣਾ ਖਾ ਲੋ ਜੇ ਕੁਝ ਹੋਵੇ ਹਲੋ ਉਹ ਲੂਕਰ ਫਰੀਸੀ ਕਰਕੇ ਜਾਈਦਾ ਸਾਨੂੰ ਇਸ ਕਰਕੇ ਪਲੇਖੇ ਪੈਂਦੇ ਕਿ ਅਸੀਂ ਨਾ ਉਹ ਰੱਖ ਲੈ ਉਪਲੇਖੇ ਵਿੱਚ ਮਾਇਆ ਦੀ ਤੋਖ ਨਹੀਂ ਰਹਿੰਦੀ ਕੋਈ ਮਾਇਆ ਦੀ ਇੱਛਾ ਨਹੀਂ ਰਹਿੰਦੀ ਮਾਇਆ ਦੀ ਇੱਥੇ ਨਾਰਾਇਣੀ ਮੁਕਤੀ ਹੈ ਜੇ ਆਮ ਪੀ ਲੈ ਫਿਰ ਉਹਦੇ ਮਨ ਨੂੰ ਬਖਤੀ ਦਾ ਚੱਗਰੀ ਵੀ ਲੱਗਦੇ ਭਗਤ ਜੈਦੇਵ ਜੀ ਦਾ ਵੀ ਸ਼ਬਦ ਹੈਗਾ ਨਾ ਆਪੇ ਉਹ ਪੀਆ ਏ ਜੀ ਵਾਲੀ ਆ ਦੇਖੋ ਪੀਣ ਵਾਲੀ ਕੀ ਹੈ ਗਿਆ ਮਾਇਆ ਦੀ ਭੁਖੌਲੀ ਮੂਰਤੀ ਤੋਂ ਦੇ ਦਵਾਰ ਚ ਖੜ ਗਿਆ ਜਾ ਕੇ ਇਸ ਗਿਆਨ ਚੋਂ ਦੋ ਪਦਾਰਥ ਬਾਹਰ ਰੁਪਦਾਂਤ ਮੂਤੀ ਬੁਲਕੇ ਬੱਪਰੀ ਵੀ ਗਿਆਨੇ ਤਿਆਗਾ ਮੂਤੀ ਤਿਆਗ ਲਈ ਅੱਗੇ ਜਾਦੇ ਆਪਣਾ ਜੋ ਕੈਸਰੀ ਜੀ ਪੂਰਾ ਹੋਇਆ ਉਸਦੀ ਮਿਲ ਗਈ ਘਰ ਦੇ ਵਿੱਚ ਪ੍ਰਵੇਸ਼ ਨਹੀਂ ਹੋਇਆ ਜੀ ਤੇ ਬੈਠੇ ਆਇਆ ਜਦੋਂ ਆਪਾਂ ਬੈਠੇ ਜਿਦਾਂ ਕਰਕੇ ਪਰਵੇ ਜਿਦਾਂ ਆਇਆ ਜੋਂ ਇਹ ਭੋਜਨ ਅਲੱਭ ਹੈ ਸੰਤੋ ਲੱਭੈ ਗੁਰੂ ਵਿਚਾਰ ਭਾਗਤਾਂ ਨੂੰ ਇਹ ਵੀ ਭੋਜਨ ਭਾਈ ਅਲੱਭ ਹੈ ਜਿਹਦਾ ਵਧਾ ਦਾ ਭੋਜਨ ਬਾਹਰ ਵਾਲਾ ਭੋਜਨ ਨਹੀਂ ਹੈ ਅਲੱਭ ਹੈ ਸੰਤੋ ਲੱਭੈ ਗੁਰੂ ਵਿਚਾਰ ਇਹ ਗਿਆਨ ਵਿਚਾਰ ਚ ਲੱਭਦਾ ਗਿਆਨ ਵਿਚਾਰ ਗੁਰੂ ਵਿਚਾਰ ਗਿਆਨ ਵਿਚਾਰ ਕਿਰਬੀ ਰਿਆਨ ਗਿਆਨ ਵਿਚਾਰ ਤੋਂ ਪਾਇਆ ਫਿਰਥਾ ਚੱਲੂ ਇਹ ਗਿਆਨ ਵਿਚਾਰ ਦੀ ਪਾਇਆ ਤੇ ਚਲ ਰੁੱਥਾ ਚਲਾ ਗਿਆ ਮਰਬਾਨੀ ਨੇ ਵਿਚਾਰ ਦੀ ਕਿ ਇਹ ਨਮਰਖਾ ਚਲਾ ਗਿਆ ਬੜੀ ਹੈ ਗੱਲ ਨਹੀਂ ਬਣਦੀ ਪੜੀ ਤਾਂ ਜਹੀ ਤੇ ਇਹਦੇ ਬੁੱਧੀ ਮੁਤਾਬਕ ਜੇ ਹੁੰਦੀ ਹੈ ਗੁਜਾਰਤਾ ਹੈ ਗੁਰ ਸਿੱਖਾਂ ਦੀ ਭਾਲ ਗੁਰ ਸਿੱਖਾਂ ਦੇ ਫਿਰ ਵੀ ਲੱਭ ਲਈ ਭਾਲ ਲਈ ਖੋਜ ਲਈ ਤੇ ਉਹ ਵਿਚਾਰ ਤੋਂ ਬੋਲਦੀ ਗੱਲ ਬਣਦੀ ਜੇ ਪੜ ਪੜ ਕਰਦੀ ਲੇਤੀ ਹੈ ਹੋ ਜੂਗਾ ਕੰਮ ਹਾਂਜੀ ਇੱਥੇ ਜਿਹੜਾ ਮੁਹਾਵਣੀ ਲਿਖਿਆ ਹੈ ਇਹ ਬਿਨਾ ਟਿੱਪੀ ਤੋਂ ਲਿਖਿਆ ਜੀ ਅਜਲ ਆਈ ਦੀ ਉਹ ਉਹਦਾ ਹੀ ਰਖਣੀ ਚਾਹੀਦੀ ਵੀ ਬਿਲੀਟੀ ਪੀਤੇ ਸਭ ਜਿਹਾ ਰੱਖਦੇ ਨਾ ਪਰ ਪਤਾ ਤਾਂ ਖਾਈ ਵੀ ਬੁਨਾਵੜੀ ਹੈ ਇਸ ਕਰਕੇ ਇਹਨੂੰ ਸੰਥਿਆ ਨਾਲੇ ਪੜਾਇਆ ਜਾਂਦਾ ਸੀਗਾ ਸੰਥਿਆ ਦਾ ਬੁਸਲ ਵੀ ਸੀਗਾ ਵੀ ਕਿ ਪੀਓ ਕਿੱਥੇ ਹੈ ਜੀ ਵਿਦਿਆ ਕਿੱਥੇ ਲਾਉਣੀ ਹੈ ਕਿੱਥੇ ਦੀ ਲਾਉਣੀ ਹੈ ਕਿੱਥੇ ਆਦਕ ਲਾਉਣਾ ਕਿੱਥੇ ਗਰੀ ਲਾਉਣਾ ਆਦਕ ਕਿਤੇ ਵੀ ਨਹੀਂ ਲਾਇਆ ਸਿੱਖ ਜਿਹੜਾ ਹੈਗਾ ਲਫਜ਼ ਉਹਤੇ ਵੀ ਆਦਕ ਨਹੀਂ ਜਿਹੜਾ ਸਿੱਖ ਲਫਜ਼ ਜਿੱਥੇ ਸਿੱਖਿਆ ਉਥੇ ਵੀ ਆਰ ਕਹਿੰਦੀ ਹਨ ਕਿ ਸੇਖਾ ਪੜੋਗੇ ਸਿੱਖ ਕੇ ਕਿੱਥੋਂ ਪੜੋਗੇ ਇਹ ਤਾਂ ਫਿਰ ਵਿਸ਼ਾ ਵਿਚਾਰ ਦਾ ਵਿਸ਼ਾ ਠੀਕ ਹੈ ਜੀ ਇਹ ਐ ਕਿਉਂ ਲਿਖਿਆ ਜੀ ਇਹ ਮੁੰਧਾਵਣੀ ਕਿਉਂ ਵਿੱਚੋਂ ਕੱਢੀ ਕੀ ਭਾਵ ਬਣਦਾ ਖੋਜੀ ਕਿ ਠੀਕ ਹੈ ਜੀ ਫਦਾ ਰੱਖੀ ਐ ਉਰਤਾਰ ਇਹਨੂੰ ਸਦਾ ਹੀ ਹਿਰਦੇ ਚ ਰੱਖਣਾ ਚਾਹੀਦਾ ਹੋਏ ਵੀ ਭਾਈ ਜੇ ਤੁਸੀਂ ਸਾਡੇ ਸਭ ਵਿੱਚ ਇਹ ਸਿੱਕੇ ਅੱਖ ਨਹੀਂ ਇਹ ਆਣ ਕਿ ਆ ਕੁਝ ਹੋਰ ਹੋਇਆ ਹੱਥ ਕੁਝ ਹੋਰ ਨਹੀਂ ਗੁਰਬਾਣੀ ਦੇ ਚ ਪਹਿਲੇ ਅੱਧ ਚ ਵੀ ਕਹ ਦਿੱਤੀ ਫਿਰ ਜਿਹੜਾ ਆਖਰੀ ਅੱਧ ਹੈ ਚ ਫੇ ਪੰਜਵੇਂ ਨੇ ਕਹੀ ਹੈ ਇੱਥੇ ਤੀਜੇ ਪਾਸੇ ਨੇ ਕਹੀ ਹੈ ਆਹ ਪਹਿਲੇ ਦਾ ਵਿੱਚ ਵੀ ਕਹ ਦਿੱਤੀ ਠੀਕ ਹੈ ਜੀ ਇਹ ਮੁੰਦਾਵਣੀ ਸਤ ਪਾਈ ਗੁਰਸਿੱਖਾਂ ਲੱਦੀ ਪਾਲ ਇਹ ਸਤਿਗੁਰੂ ਨੇ ਪਾਈ ਆ ਮਸਾਬੀ ਤੋਂ ਕਿ ਸਤਿਗੁਰੂ ਨੇ ਸਾਰੀ ਸਾਰੀ ਲਿਖਾਈ ਆ ਬਾਣੀ ਦਾ ਜਿਵੇਂ ਪਾਈ ਆ ਪਾਈ ਸਤਿਗੁਰੂ ਨੇ ਪਾਈ ਆ ਤੇ ਪੁਆਈ ਸਤਿਗੁਰ ਤੋਂ ਆ ਹਾਂ ਠੀਕ ਹੈ ਜੀ ਗੁਰਸਿੱਖਾਂ ਲੱਦੀਪਾਲ ਗੁਰਸਿੱਖਾਂ ਦੇ ਵੇਖੀ ਬੁਝੇ ਜੀ ਬਈ ਆਪ ਤੇ ਦੇਖੋ ਸਿੱਖੋਂ ਹੁਣ ਵੀ ਕੀ ਜੀ ਨਾਨਕ ਜਿਸ 부ਝਾਏ ਸੋ 부ਝਸੀ ਹਰ ਪਾਇਆ ਗੁਰਮੁਖੀ ਕਾਲ ਇਹ ਕੋਲ 부ਝਾਏ ਲਫ਼ਜ਼ ਕਰਕੇ 부ਝਾਰਤ ਮੁਤਾਬਦੇ ਅਸਰ ਦੇਤੇ ਸੀ ਅਸੀਂ ਮੁਤਾਬਦੇ ਅਸਰ 부ਝਾ ਨਾ ਬੁਰਖ ਕੱਲ ਨਹੀਂ ਭਾਰ ਤੇ ਬਾਜ ਜਿਸੇ 부ਝਾਏ ਸੋ 부ਝਸੀ ਇਹ 부ਝਾਰਤੋਂ ਜੇ ਤੂੰ 부ਝਾਰੇਗਾ ਇਹਨੂੰ ਇਹ ਰੋਣਾ ਮਤਰਾ ਵੇ ਜੀ ਤੇ ਉਹਦੀ ਕਿਰਪਾ ਬੇਰੋਹੀ ਉਹ ਹੀ ਕੁਝਦਾ ਇਹ ਹਰ ਪਾਇਆ ਗੁਰਮੁਖੀ ਘਾਲ ਹਾਂ ਗੁਰਮੁਖਾਲੇ ਘਾਲ ਕਬਰੀ ਕੀਤੀ ਐ ਵਿਚਾਰ ਖਵਦ ਵਿਚਾਰ ਕੀਤਾ ਗੁਰਬਾਣੀ ਚੋਂ ਹੀ ਗੁਰਬਾਣੀ ਦੇ ਅਰਥ ਖੋਜਣੇ ਪੈਣਗੇ ਹਾਂਜੀ ਗੁਰਬਾਣੀ ਪੂਰਾ ਗੁਰਸਤ ਕੋ ਰਹਿ ਜਿਆਦਾ ਸੀ ਨਾ ਕੋਈ ਗੁਰੂ ਮਿਲ ਲਿਆ ਕੋਈ ਹੋਰ ਇਹ ਰਹਿ ਗਈ ਗਿਆ ਠੀਕ ਬਾਤ ਆ ਸੀ ਗੁਰੂ ਬੋਲਦੇ ਸਨ ਦੂਜਾ ਬਾਦੇ ਹੋਰ ਕਟਾਂਪਾ ਦੀ ਵੀ ਤੁਹਾਨੂੰ ਲੋੜ ਹੈ ਨੂੰ ਸਮਝਣ ਵਾਸਤੇ ਇਹ ਆਪਣੇ ਆਪ ਨੂੰ ਲਾ ਕੇ ਸ਼ਬਦ ਹੈਗਾ ਮንዳਵਣੀ ਇਹਦੀ ਵਿਆਖਿਆ ਵੀ ਕਰਤੀ ਹੈ ਨਾਲ ਹਾਂਜੀ ਫੇਰ ਵੀ ਕੁਝ ਲੋਕ ਜਿਹੜੇ ਆ ਹੈਗਾ ਇਹ ਮੰਦੀ ਗਈ ਬਾਣੀ ਇੱਥੇ ਉਹ ਠੀਕ ਹੈ ਜੀ ਗੱਲ ਆਈ ਕਿ ਉਹਨਾਂ ਮንዳਵਲੇ ਠੀਕ ਹੈ ਉਹ ਕਹਿੰਦੇ ਇੱਥੇ ਟਿੱਪੀ ਨਹੀਂ ਲੱਗੀ ਉਹਨਾਂ ਨੂੰ ਸ਼ਰ ਗਿਆਨ ਨਹੀਂ ਸੀ ਕਿ ਟਿੱਪੀ ਜਿਹੜੀ ਹੈ ਉਹ ਬਾਅਦ ਚ ਨੇ ਜਾਣ ਕੇ ਟਿੱਪੀ ਲਾਈ ਉਹ ਕੇ ਲਾਈ ਉਹ ਜੋ ਤੁਰ ਮੇਲੇ ਤੇ ਮਿਲ ਰਹੇ ਸਤ ਗੁਰੂ ਤੇ ਵਿਛੜੇ ਦੂਜੇ ਭਾਇ ਕੋ ਇਹ ਜੰਤਰਾਤ ਨੇ ਆਪਣਾ ਮੁੱਢਾ ਲਿਆ ਲਿਆ ਹਾਂਜੀ ਉਹਨੂੰ ਤਰ੍ਹਾਂ ਤਰ੍ਹਾਂ ਦਾ ਇਹ ਦੋ ਦਿਨ ਨੂੰ ਮਾਨਾ ਦਿੱਤ ਦੋ ਦਿਨ ਉਸੇ ਦਾ ਜੇ ਸਮਝਾ ਲਿਆ ਤਾਂ ਉੱਪਰ ਮਿਲ ਗਿਆ ਸਕਦਾ ਆਪਣੀ ਮਰਜ਼ੀ ਨਾਲ ਲੱਗਦੀ ਹੋ ਸਕਦਾ ਇਹਦੀ ਕੋਈ ਮਰਜ਼ੀ ਨਹੀਂ ਆਪਣੀ ਮਰਜ਼ੀ ਆਪਣਾ ਲੈ ਹੋਈ ਹੈ ਅੰਦਰਲੇ ਦੀ ਮਰਜ਼ੀ ਪਰਮੇਸ਼ਰ ਦੀ ਮਰਜ਼ੀ ਦੋਹਾਂ ਦਾ ਟਕਰਾਅ ਹੈ ਇਹਨਾਂ ਵਿੱਚ ਜਿੱਥਾ ਜਰ ਅੰਦਰਲੇ ਤੇ ਬੁਨਤਾ ਖੜਾ ਹੈ ਤਦ ਉਹਨਾਂ ਹੋ ਗਏ ਸਰਬ ਦੀ ਚਿੰਤਾ ਜਸਮਨ ਹੋਈ ਸਰਬ ਦੀ ਚਿੰਤਾ ਪਰਮੇਸ਼ਰ ਦੇ ਮਨ ਚ ਪਰ ਅਸੀਂ ਆਪਣੀ ਚਿੰਤਾ ਆਪ ਕਰਦੇ ਹਾਂ ਲੋਕਾਂ ਦੀ ਕਰਦੇ ਹਾਂ ਬੱਚਿਆਂ ਦੀ ਕਰਦੇ ਹਾਂ ਤਾਂ ਕਿ ਲੋਕ ਚਿੰਤਾ ਬਤ ਕਰੋ ਚਿੰਤਾ ਤੁਸੀਂ ਸਾਰੀ ਗੇੜ ਦੀ ਪਰਮੇਸ਼ਰ ਨੂੰ ਚਿੰਤਾ ਤੇ ਚਿੰਤਾ ਕਰ ਜੋ ਤੁਰ ਮਿਲ ਆਇਆ ਅੰਦਰ ਆਤਮਾ ਨਾਲ ਮਿਲਿਆ ਹੋਇਆ ਇੱਕ ਹੋ ਗਿਆ ਗੁਰੂ ਉਹਨੇ ਆਪਣਾ ਗੁਰੂ ਸਮਝਾ ਲਿਆ ਉਹ ਸਮਝਾਉਣ ਕਾਰਨ ਉਹ ਝੁਕ ਪੜੀ ਆਪਣੇ ਮਨ ਨੂੰ ਆਪ ਸਮਝਾਉਣਾ ਪੈਂਦਾ। ਉਹ ਬਿੜਿਆ ਰਹਿੰਦਾ ਮਨ। ਇਹ ਅੰਦਰ ਆਤਮਾ ਮੇਰਾ ਮਨ ਦੇ ਨਾ ਚਾਹਦੇ ਵਾਸਤੇ। ਹਾਂਜੀ। ਜੋ ਤੁਰ ਮੇਲੇ ਸੇ ਮਿਲ ਰਹੇ ਸਤਗੁਰ ਸਿਓ ਚਿਤ ਲਾਏ। ਦੇ ਚਰਨਾਂ ਨਾਲ ਫਿਰ ਜੁੜ ਜਾਂਦੇ ਨੇ ਉਹ ਚਿਤ ਲਾ ਲੈਣ ਦੇ। ਉੱਤਰ ਜੇ ਮੈਂ ਆਪਣੇ ਮਨ ਨੂੰ ਆਪ ਸਮਝਾਉਣਾ ਆਪਣੇ ਨਾਲ ਜੋੜਨਾ ਤਾਂ ਹੀ ਜੁੜਦਾ ਐਵੇਂ ਹੀ ਨਹੀਂ ਜੁੜਦਾ। ਆਪ ਵਿਛੋੜੇ ਨੇ ਤੇ ਵਿਛੜੇ ਦੂਜੇ ਪਾਇ ਖੋਏ ਦੇਖੋ ਧਿਆਨ ਰੇਖਣ ਅਸਲ ਵਿੱਚ ਧਿਆਨ ਮਨ ਵਿੱਚ ਜੇ ਹੋਇਆ ਆਪ ਵਿਛੋੜੇ ਜੇ ਆਪੇ ਵਿਛੋੜਦੇ ਧਿਆਨ ਨੂੰ ਅੱਥੇ ਸਿ ਨਾ ਕੇ ਸਿਰ ਵਿਛੜਾ ਰਹਿਣਾ ਵਿਛੜੇ ਦੂਜੇ ਪਾਇ ਖੋਏ ਵਿਛੜ ਦੇ ਗੁਰੂ ਦੂਜੇ ਪਾਸੇ ਕੀ ਭੁੱਖ ਮਾਇਆ ਦੀ ਭੁੱਖ ਨਹੀਂ ਝੂਠ ਦੀ ਭੁੱਖ ਮਾਇਆ ਬਹੁਤ ਸਭ ਕੋੜ ਮਾਇਆ ਮਾਇਆ ਦੀ ਭੁੱਖ ਹੈ ਦੀ ਫਿਰ ਜੁੜਦਾ ਦੂਜੇ ਪਾਸੇ ਖਵਾਏ ਹੋ ਜਾਂਦਾ ਮਾਇਆ ਦੇ ਵਿੱਚ ਹੋ ਜਾਂਦਾ ਆਪਣੇ ਆਪੇ ਨੂੰ ਭੁੱਲ ਜਾਂਦਾ ਨਾ ਨਾਨਕ ਵਿਣ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਈਐ ਕਸ ਕਰੇ ਬੰਦ ਕਰਮਾਂ ਤੋਂ ਕੁਛ ਵੀ ਨਹੀਂ ਬਚਾ ਆਪਣਾ ਹੀ ਕਰਮ ਹੈ ਆਪਣੇ ਉੱਤੇ ਆਪਣੀ ਹੀ ਕਿਰਪਾ ਕਰਨੀ ਹੈ ਬਾਹਰ ਨਾ ਜੁੜਨਾ ਹੈ ਆਪਣੇ ਮਾਇਆ ਨੂੰ ਨਹੀਂ ਛੋੜਨਾ ਆਪਣੇ ਗੋਲਣਾ ਛੋੜਨਾ ਪੁਰਬ ਲਿਖਿਆ ਕਮਾਏ ਕਬੂਦਾ ਕੀ ਹੈ ਪੁਰਬ ਲਿਖਿਆ ਜੋ ਹੈ ਮੰਨ ਲੈਂਦਾ ਉਹੀ ਕਬੂਦ ਹੈ ਪੁਰਬ ਦਾ ਮਤਲਬ ਹੈ ਪਹਿਲਾਂ ਕੋਈ چیز ਸੀ ਬਨ ਰਹੀ ਫਿਰ ਉਹ ਕਰਦੇ ਜੋ ਮੰਨ ਲਿਆ ਪੁਰਬ ਲੈ ਲਿਆ ਉਹ ਬੰਦੇ ਹਾਰੇ ਸੀ ਚੱਲਣਾ ਹੁੰਦਾ ਬਾਣੀ ਵਿੱਚ ਸੁਣ ਕੇ ਬੰਦਿਏ ਨਾ ਤਾਂ ਉਹਦੇ ਨਾਲ ਸੁਭਾ ਥੋੜੀ ਬਦਲ ਜੂਗਾ। ਹਾਂਜੀ। ਪੌੜੀ ਬਹਿ ਸਖੀਆਂ ਜਿਸ ਗਾਵੇ ਹਨ ਗਾਵਣ ਹਾਰੀਆਂ ਹਰ ਨਾਮ ਸਲਾਹੋ ਨਿਤ ਹਰ ਕੋ ਬਲਹਾਰੀਆਂ। ਹਾਂ ਸਖੀਆਂ ਕੋਲ ਜਿਹੜੇ ਕੁਬਿਨਾੜਦੇ ਉਹ ਸਖੀ ਹੁੰਦੀਆਂ। ਚੱਪਤ ਡੇੜੇ ਜਿਹਾ ਰਿਸ਼ਤਾ ਹੋਵੇ। ਜਿਹੜਾ ਇੱਕ ਪਿਤਾ ਬਾਰ ਕਰਦੇ ਜਿਹੜੇ ਬੰਦੇ ਉਹ ਆਪੇ ਇਦੋਂ ਇਹ ਤਾਂ ਹੋਰ ਜਿਹੜੇ ਲੱਕੀ ਹੋ ਗਿਆ ਇੱਕ ਪਤਾ ਇਸਕੇ ਅੰਪਾਰਕ ਹੁੰਦੀ ਕੋ ਜਸ ਕਰਦੀ ਹੁੰਦੀ ਆ ਜਸ ਜਿਹੜੀਆਂ ਗਾਉਣ ਦੇ ਕਾਬਲ ਨੇ ਉਹੀ ਗਾਉਂਦੀਆਂ ਨੇ ਜਿਹਨਾਂ ਨੂੰ ਵਾਇਆ ਦੀ ਭੁੱਖ ਨਹੀਂ ਉਹੀ ਗਾਉਂਦੀਆਂ ਨੇ ਉਹੀ ਗਾਉਣ ਹਾਰੀਆਂ ਨੇ ਵਾਇਆ ਦੀ ਭੁੱਖ ਰੱਖੇ ਜਿਹੜਾ ਗਾਉਣ ਉਹ ਗਾਉਣ ਆ ਰਿਹਾ ਦਾ ਵਾਇਆ ਹਰ ਨਾਮ ਸਲਾਹੁ ਨਿੱਤ ਹਰ ਕੋ ਬਲਹਾਰੀ ਜਿਹੜਾ ਨਲਦੀ ਸਲਾਮ ਕਰਦੇ ਦਿੱਤੇ ਕਿਸੇ ਵਿਅਕਤੀ ਨੂੰ ਇਸਲਾਮ ਦਾ ਜੀ ਕਰਦੇ ਹੁਕਮ ਦੀ ਸਿਰਫ ਸਲਾਤਾ ਕਰਦੇ ਨੇ ਕਿ ਹੁਕਮ ਦੇ ਅੰਦਰ ਸਭ ਕੋ ਹੈ ਸੁਪਰੀਮ ਸਭ ਤੋਂ ਹੁਕਮ ਹੈ ਜੋ ਸੁਪਰੀਮ ਹੈ ਉਹ ਨੂੰ ਵੀ ਸੁਪਰੀਮ ਜਿਹੜੇ ਬੁਲਦੇ ਨੇ ਉਹਨਾਂ ਨੇ ਬਲਹਾਰੀ ਹੈ ਉਹਨਾਂ ਨੇ ਕੁਰਬਾਨ ਹੈ ਜਿਹੜੇ ਕਿਸੇ ਵਿਅਕਤੀ ਨੂੰ ਸੁਪਰੀਮ ਬਣ ਕੇ ਬੁਲਦੇ ਨੇ ਉਹਨਾਂ ਦੇ ਬਲਹਾਰੀ ਨਹੀਂ ਹੈ ਦੇਖੋ ਗੁਰਬਾਨੀ ਕੀ ਕਹਿੰਦੀ ਆ ਸੀ ਕੀ ਕਰਦੇ ਗੱਤ ਹੀ ਪੂਜਤ ਨਹੀਂ ਬਣ ਦਦੇ ਸਾਨੂੰ ਨਹੀਂ ਆ ਗਿਆ ਹੈ ਗੁਰਬਾਨੀ ਪੂਜਾ ਸੀ ਨਹੀਂ ਕਰ ਸਕਦੇ ਕਿਰਤ ਬਣ ਸਕਦੇ ਵੱਡਾ ਹਰ ਕੋ ਬਲਹਾਰੀਆਂ ਲਿਖਿਆ ਜੀ ਹਰ ਸਲਾਹੋ ਨਿਤ ਹਰ ਕੋ ਬਲਹਾਰੀਆਂ ਹਰ ਤੇ ਜਾਓ ਬਲਹਾਰ ਹਾਂ ਆਪਣੇ ਮੂੜ ਤੇ ਬਲਹਾਰ ਜਾਓ ਦੇਖੋ ਆਪਣੀ ਉਹ ਬੰਨੋ ਆਖਾ ਤਾਂ ਮੂੜ ਬਟਾ ਇਹ ਬੋਲ ਵੱਡਾ ਪਖੇਰੋ ਗੁਰੂ ਗੁਰ ਗੁਰ ਗੁਰ ਪਰਮੇਸ਼ਰ ਇੱਕੋ ਹੀ ਹੈ ਤੇ ਜੇ ਨਾਲੇ ਹਰ ਚੇਤਨ ਹੈ ਨਾ ਜੀ ਹਰ ਤਾਂ ਜੜਨੀ ਚੇਤਨ ਚੇਤਨ ਬਦੇ ਵੀ ਮਾਇਆ ਲਿਪਤ ਹੋਇਆ ਲਿਪਤ ਹੁੰਦਾ ਹੀ ਨਹੀਂ ਤੇ ਤਾਂ ਹੀ ਫਿਰ ਉਹਦੀ ਪੂਜਾ ਕਰਨੀ ਅਸੀਂ ਹਾਂ ਬਿਲਕੁਲ دریا ਜਿਹੜਾ ਸੰਗੁਤਰ ਨਾਲ ਜੁੜਿਆ ਹੋਇਆ ਹੈ ਉਹ دریا ਹੀ ਹੁੰਦੇ ਤੋ ਕਹਿਣ ਰੌਣਕੋ ਤੁਝਾ ਪਾਣੀ ਉਹ ਪਾਣੀ ਦਾ ਪਾਣੀ ਜੁੜਿਆ ਹੈ ਹਾਂਜੀ ਜਿੰਨੀ ਸੁਣ ਮੰਨਿਆ ਹਰ ਨਾਉ ਕਿ ਨਾ ਹੋ ਵਾਰੀਆਂ ਹਰ ਜਿਹੜਾ ਸੁਣਨਾ ਕਿ ਬਦਲੇ ਆ ਲੋਕ ਨੂੰ ਹੁਕਮ ਨੂੰ ਬਦਲੇ ਆ ਜਿਹੜੇ ਬਾਣਾ ਸੁਣਿਆ ਪਹਿਲਾਂ ਤਾਂ ਵੀ ਜੋ ਕੁਝ ਸੰਸਾਰ ਚ ਹੋ ਰਿਹਾ ਹੈ ਦਾ ਬਾਣਾ ਔਰ ਸੁਣ ਤਲਿਆ ਬਲਿਆ ਹੈ ਦੀ ਉਹਨਾਂ ਦੀ ਗੱਲ ਨਹੀਂ ਬਾਣੀ ਖਣ ਕਰਵਾਣ ਦਾ ਆਦੋ ਚੱਲ ਰਿਆਂ ਜਿਹਨਾਂ ਨੇ ਸੁਣ ਕੇ ਬੰਨ ਲਿਆ ਉਹੀ ਪਾਸ ਸੁਣ ਕੇ ਜਿਹਨਾਂ ਨੇ ਬੰਨ ਲਿਆ ਵਾਤੀ ਫੇਲ ਦੇ ਫੇਲ ਸੁਣ ਪਾਸੇ ਲਿਆ ਸੁਣਨਾ ਕੋਈ ਫਰਕ ਨਹੀਂ ਪੈਂਦਾ ਪੜੇ ਸੁਣੇ ਕਿਆ ਹੋਈ ਜਿਸਾ ਜਨੂ ਬੰਨ ਲਿਆ ਸੋਈ ਬੋਟ ਟਿਕਦਾ ਖਾਦਾ ਬੋਟ ਟਿਕਦਾ ਬੁੰਦੇ ਤੇ ਬੁੰਦੇ ਮੈਨੂੰ ਬੋਲਦੀ ਟਿਕਦਾ ਅਜੇ ਨਾ ਬੋਲ ਟਿਕਿਆ ਪ੍ਰਾਪਤੀ ਹੈ ਜਿਹਦਾ ਟਿਕਿਆ ਨਹੀਂ ਕੋਈ ਵੀ ਪ੍ਰਾਪਤੀ ਨਹੀਂ ਕੁਝ ਵੀ ਪ੍ਰਾਪਤੀ ਨਹੀਂ ਕਰਦੇ ਰੋ ਕੀਤਰ ਦੇ ਰਾਤ ਜਬਨ ਦੀ ਟਿਗਿਆ ਦਾ ਮਤਲਬ ਬੁਧਿਆਰੀ ਇਹ ਬੁਧਿਆ ਨਹੀਂ ਤਾਂ ਬੁਧਿ ਟਿਗਿਆ ਜੀ ਹਾਂਜੀ ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆਂ ਹੋਂ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਗੁਰਮੁਖੀਆਂ ਹਰ ਮੇਲ ਅੱਜ ਗੁਰਮੁਖੀ ਨੂੰ ਭਲਾਇਆ ਉਹ ਮਿਲਾਵਣ ਦਾ ਅਰਥ ਆ ਉਹ ਦੂਜੇ ਰੂਪੀ ਬਲਾ ਸਕਦੀਆਂ ਨੇ ਰਾਜਾਂ ਦੀਆਂ ਨੇ ਵਿਧੀਆਂ ਜਲਦੀਆਂ ਨੇ ਗੁਰਮੁਖ ਆਪ ਮਿਲਿਆ ਹੈ ਦੂਜਿਆਂ ਨੂੰ ਮਿਲਣ ਦੀ ਬਿਧੀ ਦੱਸ ਸਕਦਾ ਹੈ ਬਲਾਵਣ ਹਾਰੀਆਂ ਨੂੰ ਬਸ ਉਹਨੂੰ ਹਾਲੇ ਮਾਲੀਓ ਉਹ ਬਲਾਵਣ ਹਾਰੀਆਂ ਦੱਸ ਸਕਦੇ ਉਹ ਦੱਸਿਆ ਹੀ ਗੁਰਮੁਖ ਨੇ ਜ਼ੋਰ ਕੀ ਕੀਤਾ ਹਾਂ ਜਾਵਾਂ ਦਿਨ ਰਾਤ ਗੁਰ ਹਾਂ ਜਿਹਨਾਂ ਨੇ ਆਪਣੇ ਤਦੋਂ ਨੂੰ ਆਪਣੇ ਗੋਲ ਨੂੰ ਹਰ ਵਕਤ ਉਹਨੂੰ ਦੇਖਦੀਆਂ ਨੇ ਹਰ ਵਕਤ ਉਹ ਕੁਰਵਾਨ ਉਹਦੇ ਚ ਰਹਿੰਦਾ ਹੈ ਧਿਆਨ ਰੱਖਦੀਆਂ ਨੇ ਉਹਨਾਂ ਦੇ ਨਾਲ ਕੁਰਵਾਨ ਠੀਕ ਹੈ ਜੀ ਇੱਥੇ 8ਵੀਂ ਪੜ੍ਹਾਈ ਸਮਾਪਤੀ ਹੈ ਜੀ